ਤਾਂ ਫਲ ਬਨ ਭੂਲੇ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਦੂਨਾ ਨਾ ਪੜਾਈ ਫੰਕ ਵਿਚਾਰਾ ਹੈ ਤਾਂ ਫਲ ਫੰਕ ਸਭੈ ਤਨ ਫਾਰ ਹੈ ਕਿਸੇ ਵੀ ਬਿਰਸ਼ੀ ਨੂੰ ਜਦ ਥੜ ਲੱਗਦਾ ਤਾਂ ਫਲ ਪਹਿਲਾ ਹੋ ਜਾਂਦਾ ਬਟ ਇਹਨਾਂ ਦਾ ਲੱਗਦਾ ਨਾ ਫਿਰ ਫੁੱਲ ਨਹੀਂ ਹੁੰਦਾ ਫੁੱਲ ਪਹਿਲਾ ਹੁੰਦਾ ਫੁੱਲ ਕੀ ਹੁੰਦਾ ਫੋਲਤਾ ਉਹ ਜਿੰਦੇ ਜਿਹੜੇ ਕੋਕੜ ਧਰਮ ਕਜੂ ਫੜਨਾ ਹੈ ਜਿਹੜੇ ਭੋਕੇ ਤੋਂ ਪਹਿਲਾਂ ਕੀਤੇ ਨੇ ਨਾ ਗੁਰਬਾਣੀ ਤੋਂ ਪਹਿਲਾਂ ਪਹਿਲਾਂ ਪੁਰਬਾਹ ਪੁਰਬਾਹ ਬੋਲੋ ਤੇ ਪਹਿਲੇ ਬਰੇ ਬੋਲੋ ਉਹੀ ਤੇ ਬੋਲੋ ਜਦ ਗੁਰਮਤਿ ਨੂੰ ਮੰਨਣ ਲੱਗਿਆ ਫੋਲ ਚੜੜੇ ਤਾ ਬੋਲ ਹੋਊਗੀ ਫੋਲ ਜਿੰਨਾ ਚਿਰ ਹੈ ਜਿਹੜੇ ਬੰਨ ਹੁੰਦੀ ਸਗਲ ਤੋਂ ਬਾਅਦ ਮੰਨਣਾ ਜਿੱਦਾਂ ਜਦ ਮੈਂ ਕੁਝ ਕਰਦਾ ਬੰਦਾ ਉਹਨਾਂ ਜਦ ਫੁੱਲੇ ਫੁੱਲੇ ਫੜ ਨਹੀਂ ਹੜ ਕੀ ਹੈ ਮੈਨੂੰ ਉਹ ਸੋਚੀ ਬੜਜਵੇਂ ਇਹ ਫੜਾ ਸੋਚੀ ਤਾਂ ਪਹਿਲਾਂ ਪਹਿਲਾਂ ਫੁੱਲ ਹੈ ਸੋਚੀ ਤਾਂ ਪਹਿਲਾਂ ਪਹਿਲਾਂ ਜੋ ਕਬੀਰ ਫਿਰ ਰਿਹਾ ਜੋ ਕਰ ਰਿਹਾ ਜੋ ਕਬੀਰ ਨੇ ਕੀਤਾ ਫੁੱਲ ਹੈ ਸੋਤੋ ਪ੍ਰਾਪਤੀ ਕੁਝ ਨਹੀਂ ਹੋਈ ਜਾ ਲੋਰੂ ਫੜ ਕੇ ਦੀ ਫੜ ਸੀ ਗਿਆਨ ਜੜ ਫੜ ਲਾ ਕੇ ਜਦ ਫੜ ਲਿਆ ਗਿਆਨ ਦਾ ਘੁਰ ਚੜ ਗਿਆ ਸਭ ਕਰ ਫੜ ਛੱਡ ਤੇ ਜਦ ਪਰਮਾਨੀ ਦਾ ਗਿਆਨ ਪ੍ਰਾਪਤ ਹੋ ਜਾਣਾ ਜੋ ਘੁਰ ਘਰੇ ਛੋੜਿਆ ਸਭ ਝੂਠ ਲੱਗਣੇ ਸਭ ਛੱਡਣਾ ਪੈਣਾ ਕਿਆ ਹੋ ਗਿਆ ਲੋਕੇ ਜੀ ਹੈ ਨਹੀਂ ਇਸ ਕਰਕੇ ਹੋ ਰਿਹਾ ਸਰਬ ਜਿਹਨੂੰ ਸੋਚੀ ਹੋ ਗਈ ਛੱਡ ਦਿੰਦੇ ਕਿਉਂਕਿ ਬਦਰਾ ਦੀ ਰੀਸ ਹੈ ਉਹ ਜੋ ਹੋਵੇ ਜੋ ਉੱਥੇ ਹੋ ਰਿਹਾ ਬਦਰਾ ਜਿਹੀ ਹੋ ਰਹੀ ਗੁਰਬਾਣੀ ਦੀ ਸੋਚੀ ਵਾਸਤੇ ਇਹ ਕੁਝ ਕਰ ਰਹੇ ਹੈ ਵੀ ਮਨ ਨੂੰ ਸੋਚੀ ਆ ਜੇ ਫਿਰਤਾ ਫੁੱਲ ਫਿਰਤਾ ਸਾਰਥਕ ਹੈ ਜੋ ਕਿ ਇਹੀ ਠੀਕ ਹੈ ਕਹਾਣੀ ਕੁਝ ਵੀ ਬਦਲ ਨਹੀ ਉਥੇ ਜਾ ਕੇ ਫਿਰ ਉਹ ਦੁਰਮਤ ਵੜ ਜੂਗੀ ਹਾਲ ਤਾਂ ਬਰਬਤ ਹੈ ਜਿੱਥੇ ਤੱਕ ਮਨ ਮਰਜ਼ਾ ਉੱਥੇ ਫੁੱਲ ਹੁੰਦੇ ਨੇ। ਜੇ ਦੁਰਮਤ ਮਾਰ ਦਦਿਆ ਨਾ ਤੇ ਪੇੜ ਸੁੱਕ ਜਾਂਦਾ। ਨਾ ਉਹ ਪੱਤਾ ਨਾ ਫੁੱਲ ਨਾ ਫੜ ਕੋਈ ਕੁਝ ਨਹੀਂ ਰਹਿੰਦਾ। ਸੁੱਕੇ ਨੂੰ ਕੀ ਲੱਗਦਾ ਕੁਝ ਨਹੀਂ। ਫਿਰ ਤਾਂ ਸੁੱਕੇ ਦਾ ਹੀ ਤਾਂ ਹਰਿਆ ਹੈ। ਹਰਾ ਉਹ ਵੀ ਹੋ ਜਾਂਦਾ ਜੇ ਬਦਲਵੇਂ। ਛੱਡ ਕੇ ਉਹ ਇੱਧਰ ਆ ਜੂਰੇ ਮੰਨ ਲਵੈ ਫੁੱਲ ਨਹੀਂ ਆਉਂ ਲੱਗਦਾ ਉਹ ਫੁੱਲ ਦੀ ਪ੍ਰਾਪਤੀ ਵੀ ਨਹੀਂ ਕੋ ਕੋ ਫੁੱਲ ਵਾਸਤੇ ਨਿਕਲਿਆ ਸੱਚ ਮੰਨ ਕੇ ਕਰ ਲੈ ਸੱਚ ਮੰਨ ਕੇ ਕਰ ਲੈਣਾ ਜੇ ਫੁੱਲ ਬਣ ਕੇ ਕਰ ਲੈ ਜਿਹੜੇ ਫੁੱਲ ਬਣ ਕੇ ਕਰਦੇ ਸੀ ਉਹਨਾਂ ਨੂੰ ਫੜਉ ਲੱਗਿਆ ਉਹਨਾਂ ਨੂੰ ਇਹ ਫੜ ਲੱਗਦਾ ਗੁਰੂ ਅਰਜਨ ਦੇਵ ਸੁਲਮਾਨਾ ਕਹਿੰਦਾ ਸੀ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਕੁਝ ਅਵਸਥਾ ਕਿੰਨੀ ਉੱਚੀ ਸੀ ਜੋ ਅ즈ਲੀ ਕੀ ਜ ਹੈਗੀ ਛੁੱਟਣ ਕੀ ਵਿਧੀ ਦਾਦੀ ਸੀ ਪਤਾ ਫਸਿਆ ਹੋਇਆ ਬਾਹਰ ਰੁਕੋਈ ਗਈ ਸੀ तो ਤੋਂ ਬਾਹਰ ਕੱਜਾ माया ਬਾਹਰ ਤੋਂ ਦਾ ਬਾਹਰ ਰੁਕੋਈ ਗਈ ਸੀ ਮਾਇਆ ਜਿ ਫਸਣ ਵਾਲੀ ਤਾਂ ਸਾਲ ਜਿਹੜੀ ਸੀ ਸਮਝ ਲਈ ਸੀ ਪਰ ਛੁੱਟਣ ਉਹ ਫੁੱਲ ਆ ਜੀ ਇਹ ਤੇ ਤੇ ਦਾ ਲੋੜੇ ਨਹੀਂ ਇੱਥੇ ਕੀ ਹੈ ਤੇ ਬਿਨ ਫੁੱਲੇ ভাল ਹੋਈ ਗੁਰੂ ਘਰ ਦੀ ਪੜਾਈ ਚ ਫੁੱਲ ਦੀ ਲੋੜੇ ਨਹੀਂ ਕਰਮ ਕਾਂਡ ਦੀ ਲੋੜੇ ਨਹੀਂ ਉਹ ਸਭ ਲੱਗੀ ਦੱਸੀ ਦੁਨੀਆਂ ਮਤਾਂ ਜੋ ਕੀਤਾ ਉਹ ਫੁੱਲ ਤੱਕ ਪੁਝਾ ਰਹੀਆਂ ਨੇ ਐਦਾਂ ਤਾਂ ਫੁੱਲ ਦੀ ਵੀ ਲੋੜ ਨਹੀਂ ਗੁੱਡ ਤੋਂ ਵੀ ਫੁੱਲ ਵਾਲੇ ਰਾਹ ਪਾਈ ਕੀਰੂ ਦੋ ਗੁਰ ਅੰਗਦ ਔਰ ਅਮਰਦਾਸ ਦੋ ਰੂਪ ਦੇ ਕੀਤਾ ਨਾ ਦੋਆਂ ਦਾ ਫੁੱਟ ਝਾੜ ਕੇ ਫੜ ਬੜੇ ਨਾਮਦਾਸ ਦਾ ਚੁੜੀ ਬੜੇ ਗੁਰੂ ਘਰ ਚ ਸਿੱਧੀ ਡਾਇਰੈਕਟ ਪੜਾਈ ਹੋਈ ਹੈ ਤਨ ਤਨ RAMDAS ਗੁਰ ਜੇ ਤ ਸਰਿਆ ਤਨ ਦੁਆਰ ਪਰਦੇ ਕੀ ਲੋੜ ਪਰਦੇ ਕੀ ਲੋੜ ਇੱਥੇ ਵੜੇ ਕਿਉਂ ਨਹੀਂ ਆਇਆ? ਵੜੇ ਉਹ ਤੇ ਆਜੇ ਤੇ ਪਹਿਲਾਂ ਬਰੋਤਾ ਹੋਰ ਰਹੇ ਉਹ ਬਰੋਤਾ ਛੱਡਣੀਆਂ ਨੇ। ਪਹਿਲਾਂ ਭਾਂਡਾ ਜਿਹੜਾ ਉਹ ਪਲਟ ਕੇ ਤੂੰ ਧੋੜ। ਫੇਰ ਦੁੱਧ ਦੁਬਾਰਾ ਪਾਉਣੇ ਉਥੇ ਤਾਂ ਪਹਿਲੇ ਦੁੱਧ ਪਿਆ ਸੀ। ਬਚਪਨ ਚ ਦੁੱਧ ਪਿਆ ਸੀ। ਬਚਪਨ ਚ ਗੁਰੂ ਘਰ ਚ ਸੀ। ਉਦੇ बाद ਕਿਦੇ ਨੂੰ ਹੋ ਰਿਹਾ ਆ ਨਹੀਂ ਲੱਗ ਤੁਰਨ ਦਾ ਸੇਬਲ ਪਰਾਮਰਾਹ ਸੇਬਲ ਵੜੇ ਲਫਜ਼ ਦੀ ਆਇਆ ਤੇ ਕਿਹਦੇ ਉਪਦੇ ਆਇਆ आया ਉਪਦੇ ਤਾਂ ਹੋਇਆ ਹੈ ਪਰ ਉਹ ਨਹੀਂ ਆਇਆ ਕਿਉਂ ਨਹੀਂ ਆਇਆ ਡਾਇਰੈਕਟ ਪੜਾਈਏ ਫੁੱਲਾਂ ਨਹੀਂ ਪੜਾਈ ਤਈ ਹੈ ਫੱਪਾ ਬਿਨ ਫੁੱਲੇ ਸੁਭਾਨ ਹੋ ਰਿਹਾ ਪਾਵੇਂ ਕਬੀਰ ਨੂੰ ਫੋਟੋ ਬੜ ਬੜਿਆ ਪਰ ਉਹ ਕਹਿੰਦਾ ਜੇ ਡਾਇਰੈਕਟ ਪੜਾਈ ਹੁੰਦੀ اے پڑھائی جوہد دی ਲੋੜ نہیں کرم کارن ਦੀ ਲੋੜ نہیں ہے گرو ਘਰ ਨੂੰ کام کرم کارن دی کوئی ਲੋੜ نہیں گرو ਮਤਮ ਜੇ بچپن ਤੋਂ پڑھائی ہے ਕਰਮ کارن ਦਾ بدل بھی نہیں ہے تے ਗਿਆਨ ਗਿਆਨ پہ ਆਦਾ ਕਰਮ ਨਾਸ جو ਗਿਆਨ پہلے ہی ਹੋਣਾ ਕਰਮ ਦਾ ਨਾਸ پہلے ہی ਹੋਣਾ ਨਹੀਂ ਕਰਮ ਦਾ ਨਾਸ ਤੁਹਾਨੂੰ ਗਿਆਨ ਕਰਕੇ ਕਰਮ ਛਡਾਉਣਾ ਪੈਂਦਾ ਗਿਆਨ ਕਰਾ ਕੇ ਕਰਮ ਛਡਾਉਣਾ ਪੈਂਦਾ ਗਿਆਨ ਕਰਾ ਕੇ ਰਹਿਤੀ ਛਡਾਉਣੀ ਪੈਣੀ ਹੈ। ਲੋ ਬਰਿਆਦਾ ਛਡਾਉਣੀ ਪੈਣੀ ਹੈ। ਰਹਿ ਤਾਂ ਰੱਖਣੀ ਪੈਣੀ ਹੈ। ਰਹਿ ਕਿਉਂਦੀ ਹੈ? ਰਹਿਤ ਰਹਿਤ ਰਹਿ ਜਾਏ ਬੁਕਾਰ। ਬੁਕਾਰੋਂ ਤਾਂ ਦੂਰੀ ਬਣਾਉਣੀ ਹੈ ਰਹਿਤ। ਪਤਾ ਨਹੀਂ ਵੱਢਦੇ ਨੇ। ਸਤੋਗਰਾ ਸੂਦੀਆ ਖਿੱਚਦਾ ਲਕੀ ਰਹੀ ਰਹਿਤ। ਰਹਿਦਾ ਨਹੀਂ ਵੱਢਦੇ ਨੇ। ਅਲੜੇ ਵਖਰਾ ਤੋਂ ਵਖਰਾ ਹੋ ਕੇ ਰਹਿਣਾ ਤੋਂ ਕੋ ਸੰਗੀਆਂ ਤੋਂ ਵਖਰੇ ਹੋ ਕੇ ਰਹਿਣਾ ਮਨੋਂ ਕੋਈ ਸੰਗਤ ਨਹੀਂ ਕਰਨੀ ਸਾਗਤ ਦੀ ਸੰਗਤ ਨਹੀਂ ਕਰਨੀ ਰਹਿ ਤਾਏ ਪਰ ਇਹ ਤਾਂ ਕਹੀ ਵੀ ਜ਼ਰੂਰ ਸੰਗਤ ਸੰਗਤ ਰੱਖੀ ਜੀਏ ਦੂਰ ਜਾਈਏ ਭਾਗ ਰਹਿ ਤਾਏ ਰੋਣਾ ਨਾ ਰਹਿ ਤਾਏ ਨਾ ਬੜਾ ਦਾ ਲਾਣੇ ਉਹ ਫੁੱਲਾਂ ਵਾਲੀ ਬਣ ਗਈ ਹੁਣ ਹਿੰਦੂ ਬੱਤ ਬਣ ਗਿਆ ਜਦ ਐਦਾਂ ਬੜਿਆਦਾ ਲਾਗੀ ਤਾਂ ਸੰਧਕ ਉਹਨਾਂ ਦੀ ਆਵੜੇ ਉਹਨਾਂ ਨਾਲ ਸਭ ਕੁਝ ਉਹਨਾਂ ਨਾਲ ਆਵੜਿਆ ਸੰਧਿਆ ਵੀ ਆਵੜੀ ਬਰਬਾਦ ਉਹ ਵੀ ਆਵੜੀ ਹੈ ਮਤਵੇੜਾ ਵੀ ਆਵੜਿਆ ਸਭ ਕੁਝ ਆਵੜਿਆ ਸਾਰਾ ਆਰਤੀ ਕਰਮ ਕਾਂਡ ਸਾਰਾ ਹੀ ਆਵੜਿਆ ਤੁਸੀਂ ਇਹ ਨਾ ਕਹੋ ਵੀ ਆਰਤੀ ਕਿਉਂ ਕਰਦੇ ਹੋ ਕਰਨੀ ਦੀ ਚਾਹੀਦੀ ਆਰਤੀ ਦੇ ਬਦਲ ਦੱਸੋ ਆਰਤੀ ਕੀ ਹੁੰਦੀ ਹੈ ਆਰਤੀ ਤੇ ਤਾਰਦਾ ਵੀ ਗਿਆ ਹੈ। গোপাল ਤੇਰਾ ਹਰਤਾ। গোপাল ਤੇਰਾ। ਤੇਰੇ ਕੋਲ ਮੈਂ ਤੇਰਾ। ਮੈਂ ਆ ਗਿਆ ਤੇਰੇ ਕੋਲ। ਮੈਂ ਤੇਰਾ ਨਾਮ ਜਾੜ ਕੇ। ਹਰਤਾ। ਆਰਤਾ। ਜਦੋਂ ਤੇਰੇ ਰੰਗ ਇੱਕੇ ਨਾਲ ਗੂੜ ਰੰਗ। ਜਦੋਂ ਇਹ ਅਸਮਝ ਆਓਗੇ ਆਪੇ छुट ਜੂਗਾ ਦੀਵਾ ਜੂਗਾ। ਆਪੇ छुट ਜੂ ਦੀਵਾ ਦੀਵਾ ਦਾ ਨਾਮ ਦਾ ਜਾਣ ਲੈ ਬਾਸ ਨੂੰ ਜਾਣਿਆ। ਪਰ ਜਿਹੜੇ ਵਿਰੋਧ ਕਰਦੇ ਨੇ ਦੀਵਾ ਉਹਨਾਂ ਨੇ ਕਿਹੜਾ ਜਾਇਆ ਰੋਗੋ ਦੀਵਾ ਹੀ ਉਹਨਾਂ ਦੀਵਾ ਕੋਲ ਦਾ ਦੀਵਾ ਦਾ ਤੇਲ ਨਾਲ ਬੱਤੀ ਗੁਜੋਦੀ ਰੌਲਾ ਪਾਉਂਦੇ ਰੌਲਾ ਐਵੇਂ ਕੁਛ ਨਹੀਂ ਪੱਲੇ ਕੁਛ ਨਹੀਂ ਹੈ ਰੌਲੇ ਨਾਲ ਨਹੀਂ ਤੇਣਾ ਬੰਨਣਾ ਬੰਨਣਾ ਧਿਆਨ ਨਾਲ ਬੰਨਣਾ ਸੋਜੀ ਨਾਲ ਗੁਰਬਾਣੀ ਤੇ ਸੋਜੀ ਨਾਲ ਹੀ ਬੰਨਣਾ ਗੁਰਬਾਣੀ ਕੀ ਕਹਦੀ ਹੈ ਕੀ ਸਾਨੂੰ ਕਰਨ ਚਾਹੀਦਾ ਨਹੀਂ ਕਹੀਦਾ ਇਹ ਜੀ ਕਿਸੇ ਦੀ ਹਮਤ ਹੈ ਵੀ ਕਹਿ ਦੇ ਗੁਰਬਾਣੀ ਇਹ ਕਹਦੀ ਹੈ ਮੈਨੂੰ ਬੰਦਾ ਇਹ ਨਹੀਂ ਕਹਿਦਾ ਦਾ ਤੋ ਇਹ ਗਿਆ ਤਾਂ ਫਿਰ ਗਿਆ ਫਿਰ ਹੋਰ ਨਿਕਲ ਗਿਆ ਕਿਉਂ ਤੇ ਸਿੱਖੀਰੋ ਕਰ ਜੋ ਗਿਆ ਅਸੀਂ ਆਪਣੀ ਮਰਜ਼ੀ ਬਣਾਉਦੇ ਆ ਗੁਰੂ ਦੀ ਮਰਜ਼ੀ ਦੀ ਬਣਾਉਂਦੇ ਆਪਣੇ ਮਰਜ਼ੀ ਬਣਾਉਦੇ ਆ ਜਿਵੇਂ ਮੈਂ ਸਮਝੀ ਹੋਵੇ ਠੀਕ ਮੈਂ ਸਮਝੀਆ ਜਿਵੇਂ ਹੋ ਸਕਦਾ ਗੱਲ ਤੋਂ ਤਾਂ ਛੁੱਟਪ ਜਿਆਦਾ ਸਭ ਦਾ ਗੱਲ ਤਾਂ ਮੈਂ ਕੋਈ ਜ਼ਰੂਰੀ ਥੋੜੀ ਐ ਠੀਕੇ ਹੋ ਗਏ ਆਪਾਂ ਬੈਕਟੇ ਡਿਸਸਸ ਕਰ ਲੈਣੇ ਵਿਚਾਰ ਕਰ ਲੈਣੇ ਪਰ ਵਿਚਾਰ ਤਾਂ ਅਸੀਂ ਕਰਨੀ ਨਹੀਂ ਜੇ ਵਿਚਾਰ ਕਰਨੀ ਨਹੀਂ ਤਾਂ ਅਸੀਂ ਅਵਸਥਿਤ ਦੁਸ਼ਵਾਲਾ ਵਿਰੋਧੀ ਮਤ ਦੇਣ ਤੋਂ ਦੂਰ ਰ ਇੱਕ ਮਤ ਵਾਲੇ ਵੀ ਨੇ ਇੱਕ ਮਤ ਵਾਲੇ ਵਿਚਾਰ ਕਰਦੇ ਹੁੰਦੇ ਨੇ ਵਿਰੋਧੀ ਮਤਾਂ ਵਾਲਾ ਵਿਚਾਰ ਨਹੀਂ ਕਰਦੇ ਵਿਦਵਾਨ ਵਿਰੋਧੀ ਮਤਾਂ ਦੇ ਸਿੱਖ ਕੋਈ ਨਹੀਂ ਹੁੰਦਾ ਜੇ ਦੇਖੂਗਾ ਜਿੱਥੋਂ ਵੀ ਸਿੱਖੀ ਦੀ ਗੱਲ ਮਿਲ ਗਈ ਅਡਾਪਟ ਕਰੂਗਾ ਜਿੱਥੋਂ ਵੀ ਗੱਲ ਮਿਲ ਗਈ ਅਡਾਪਟ ਕਰੂਗਾ ਜਿਹੜਾ ਆਪਣੇ ਉਸੇ ਤੇ ਅੜਿਆ ਹੋਇਆ ਜਾਣਦਾ ਹੋਇਆ ਵੀ ਤੇਰੀ ਲਲਕ ਉਲਟ ਗਈ ਅੱਜ ਉਹ ਸਿੱਖਣੀ ਹੈ ਤੂੰ ਦੇਖੂਗਾ ਤਾਂ ਤੂੰ ਸਿੱਖਣਾ ਅਜੋ ਰਾਜਾ ਸਾਭੀ ਬਦਲੀ ਜਾਂਦੇ ਨੇ ਆਪਣੇ ਆਪ ਨੂੰ ਸਿੱਖੀ ਦੀ ਗੱਲ ਸੁਣ ਕੇ ਨਾਮ ਉਹਨਾਂ ਨੇ ਵਾਜੂ ਦਾ ਔਰਾਂ ਨੇ ਬਦਲ ਲਿਆ ਜਮੀਤ ਦਾ ਬਚ ਪਹਿਲਾਂ ਕਹਿੰਦੇ ਇੱਕ ਦੋ ਤੱਤ ਹੁੰਦੇ ਨੇ ਫਰਾਡੀ ਜੀ ਇੱਕ ਤੱਤ ਹੁੰਦਾ ਪੰਜ ਤੱਤ ਨਹੀਂ ਉਹ ਬਦਲ ਲਿਆ ਉਹਨਾਂ ਨੇ ਦੇ ਦੇ ਦਰਸ਼ਨ ਬੰਦ ਕਰਤੇ ਉਹ ਬਦਲੀ ਜਾਂਦੇ ਨੇ ਸੁਣ ਕੇ ਇਹ ਉੱਚੇ ਘੜੇ ਨੇ ਜਿੰਦ ਨਹੀਂ ਆਉਦੀ ਉਹਦੇ ਡਵੈਲਪਮੈਂਟ ਕਦੇ ਨਹੀਂ ਹੁੰਦਾ ਬੜਬੜ ਕੇ ਜਿਹੜਾ ਆਲੇ ਬਰ ਬੜ ਬੈਦਰ ਤਾਵ ਤਾਵ ਠਾਇ ਮਨ ਟਿਕੂ ਕਵੇ ਪ੍ਰਭੂ ਤੇ ਟਿਕੂ ਜਿਉ ਜੋ ਤੇ ਕਿਚਾਂ ਰੰਗ ਜਾਊਗਾ ਇਹ ਕਾਲਾ ਆਪੇ ਥਲੇ ਰਹੇ ਜੂਗੇ ਕੋਲ ਨਹੀਂ ਜਾਓ ਚਿੱਟੇ ਚਿੱਟੇ ਕੋਲ ਕਰੀ ਜਾਓ ਤੇ ਜਾਣੀ ਜਾਓ ਰੰਗ ਕਰੰਦਾ ਕਿਤਾ ਰੋਜ ਆਪੇ ਥਲੇ ਲਿਖਣਾ ਹੀ ਨਹੀਂ ਹੋ ਬੈਦਰ ਤਾਵ ਤਾਵ ਠਾਇ ਤੱਕ ਬੈਦਰ ਤੋਂ 14 ਨਹੀਂ ਆਉਂਦਾ ਜਦ ਤੱਕ ਪ੍ਰਬੋਧ ਹੀ ਆਉਂਦਾ ਜਦ ਮੈਂ ਕੋਲ ਨੂੰ ਉੱਚਾ ਚ ਉੱਚਾ ਗਿਆ ਤੇ ਜੋ ਜਿੰਨਾ ਜਿਆ ਗੋਤਾ ਜਿਆਦਾ ਪੈਦਾ ਉੱਤੇ ਬੋਝ ਲੱਦੀ ਜੋ ਜੇ ਖਰਕਾ ਫੈਕੜ ਤਾਂ ਛੋਟੇ ਲੱਗਦਾ ਜਾਂ ਉੱਪਰ ਲੱਗਦਾ ਉਹਨਾਂ ਜਿਹਨੂੰ ਤੇ ਲੱਦੀ ਜੋ ਬੋਝ ਗਿਆਨ ਦਾ ਬੋਝ ਲੱਦੀ ਜੋ ਗਿਆਨ ਗੋੜ ਪਰ ਡੈਰੀਓ ਅ ਜੇ ਤੇ ਗਿਆਨ ਨਾਲ ਪਰ ਹੋਏ ਨੂੰ ਕਰਮ ਕਾਂਡ ਤੇ ਪੜਨ ਲੱਗੇ ਤਾਰਾ ਫਲ ਫਲਕ ਲਖੈ ਜੋ ਕੋਈ ਤਾਰਾ ਫਲ ਫਲਕ ਲਖੈ ਜੋ ਕੋਈ ਫਲ ਲਗੂਗਾ ਬਿੜੋ ਫੁੱਲ ਤੇ ਫੁੱਲਣੀਆਂ ਨੂੰ ਸਿੱਧਾ ਫਲ ਆਉਗਾ ਕਿਰਦਾ ਫਲ ਕੀ ਹੁੰਦਾ ਫੁੱਲ ਕੀ ਹੁੰਦਾ ਨਾਨਕ ਗੁਰ ਸੰਤੋਖ ਰਖ ਤਾਰਾ ਬੋ ਫੁੱਲ ਫੜ ਗਿਆ ਉਹ ਲਤਾ ਜਦ ਸੀ ਜਿਹੜਾ ਫੁੱਲ ਸੀ ਉਹਨੇ ਰਣ ਦਾ ਸਾਨੂੰ ਗੁਰਮਤਿ ਗੁਰੂ ਸਿਖਾਡੇ ਦਾ ਜਾਨੂੰ ਮਿਲਿਆ ਉਹ ਸਿਖਾਂ ਦੇ ਕਰਕੇ ਜਾਨੂੰ ਮਿਲਿਆ ਉਹ ਫੁੱਲ ਪਹਿਲਾਂ ਹੀ ਝੜ ਗਿਆ ਉਹ ਫੁੱਲ ਕਰਕੇ ਹੀ ਮਿਲਿਆ ਜਾਨੂੰ ਉਰਦਾ ਸਾਡਾ ਫਰਜ਼ ਆ ਇਹਨੂੰ ਹੈ ਸਾਡਾ ਨਹੀਂ ਫੁੱਲ ਦਾ ਨੁਬਰ ਫੁੱਲ ਦਾ ਨੁਬਰ ਉਹ ਜਿਹੜੇ ਹੋਰ ਕਰਕੇ ਜੰਮੇ ਹੋਏ ਨੇ ਇਹਦਾ ਤਾਂ ਰੱਬ ਨੇ ਸਿਖਾਣੇ ਕਰ ਹੋਇਆ ਉਹ ਰਾਉ ਦਾਸ ਦਾ ਜਨਮ ਸਿੱਖਾਂ ਦੇ ਘਰ ਹੋਇਆ ਡਾਇਰੈਕਟਰ ਤਾਂ ਨਹੀਂ ਫੁੱਲ ਲਗਿਆ ਫਿਰ ਅਜੇ ਉੱਥੇ ਗੱਲ ਜਿਨ੍ਹਾਂ ਦਾ ਸਿੱਧਾ ਘਰ ਗੁਰੂ ਘਰ ਜਨਮ ਹੋਇਆ ਉਹਨਾਂ ਨੂੰ ਫੁੱਲ ਦੀ ਲੋੜ ਕੀ ਪਈ ਐ ਉਹ ਦੂਏ ਘਰ ਜਨਮ ਦੀ Hindu ਕਰਨ ਉਹਨੂੰ ਫੁੱਲ ਸੀ ਉਹ ਝਾੜੇ ਫਿਰ ਤਾਂ ਦੂਆ ਉਹਨੂੰ ਤਾਂ ਉਹ ਖਤਮ ਕੀਤੀ ਦੇਵੀ ਵਾਲੀ ਬਨਾਰਸ ਜੋ ਵੀ ਕੋਸੀ ਉਹ ਸਾਰਾ ਉਹਦਾ ਲਾ ਕੇ ਨਾ ਪਹਿਲਾ ਰੰਗ ਉਦੋਂ ਲੈ ਕੇ ਆ ਗਏ ਅਹਰੂ ਉਨ ਟਾਈਮ ਵੀ ਲੱਗਦਾ ਇਹ ਤਾਂ ਸਿੱਧਾ ਸਿੱਖਾਂ ਦੇ ਘਰ ਜਾਣ ਬੋਇਆ ਫੁੱਲ ਤਾਂ ਇਹਨਾਂ ਦੇ ਪਹਿਲਾਂ ਹੋ ਚੁੱਕਿਆ ਉਹ ਪ੍ਰੋਸੀਜਰ ਇਹਨਾਂ ਦਾ ਪਹਿਲ ਹੀ ਚੁੱਕਿਆ ਜੇ ਅਸੀਂ ਇੱਥੇ ਆ ਕੇ ਫਿਰ ਅਡਾਪਟ ਕਰ ਲਿਆ ਸਾਡੀ ਬਦਕਿਸਮਤੀ ਯੂਨੀਵਰਸਲ ਵੇਰੂ ਵਾਲੇ ਇਹਨਾਂ ਲੋਹ ਨੇ ਸੰਤ ਨੇ ਇਹ ਉਹਨਾਂ ਨੇ ਬੇੜਾ ਕਰ ਕੀਤਾ ਜਿਹੜੇ ਬੜਾ ਨੇ ਸਿੱਧੇ ਹੋ ਜੀ ਤੇ ਬਠੇ ਉਹਨਾਂ ਦੀ ਅਸੀਂ ਮੰਨਦੇ ਨਹੀਂ ਉਹਨਾਂ ਦੀ ਕੋਈ ਵੀ ਨਹੀਂ ਮੰਦਾ ਹੁੰਦਾ ਪਹਿਲਾਂ ਕਿਹੜਾ ਨਾਨਕ ਦੀ ਬੰਦੇ ਸੀ ਇਹ ਉਹਨਾਂ ਦੀ ਮੰਨਣ ਨਹੀਂ ਦਿੰਦੇ ਉਹਨਾਂ ਨੂੰ ਕਬਲੇ ਸਮਝਦੇ ਨੇ ਕਹਿੰਦੇ ਹੁੰਦੇ ਨੇ ਕਬਲੇ ਭਗਤਾਂ ਨੂੰ ਕਿ ਕਵੜਾ ਦੀ ਭਗਤ ਕਹੇ ਇਹ ਕਵੜਾ ਨਹੀਂ ਤੇ ਬਗਦਗਾ ਦਾ ਰਾਮ ਕੀ ਉਹ ਬੋਰਾ ਕਹਿ ਰਹੇ ਕਬੀਰ ਵੀ ਰਾਮ ਨੇ ਬੜਾ ਕੀਤਾ ਪਰ ਫਿਰ ਵੀ ਕਹਿ ਰਹੇ ਸੋ ਬੋਰਾ ਜੋ ਆਪਰਾ ਪਿਛੜ ਰਿਹਾ ਅਸਲ ਬੋਰਾ ਹੋ ਐ ਐਕਚੁਅਲੀ ਬੋਰਾ ਤਾਂ ਹੀ ਹੈ ਜਿਹਨੇ ਆਪਣੀ ਆਪਣੀ ਪਿਛੜਿਆ ਆਤਮ ਗਿਆਨੀ ਨਹੀਂ ਜਿਹਦੇ ਆਤਮ ਨਹੀਂ ਖੋਜਿਆ ਤਾਂ ਫਲ ਫੰਕ ਲਖਾਜੋ ਕੋਈ ਤਾਂ ਫਲ ਫੰਕ ਲਖਾਜੋ ਕੋਈ ਉਸ ਫਲ ਦੀ ਫੁਲਕ ਫਾੜੀ ਜੇ ਕੋਈ ਦੇਖ ਲਵੇ ਖਾਵੇ ਨਹੀਂ ਲਿਖਿਆ ਦੇਖ ਲਵੇ ਤੇ ਫੰਕ ਦਾ ਲਖਾਇਆ ਜੇ ਕੋਈ ਆਹ ਇਹ ਦੇਖੜੀ ਜੀ ਹੈ ਫੜੜੀ ਸਮਝਣ ਵਾਲੀ ਚੀਜ਼ ਹੈ ਖਾਣ ਵਾਲੀ ਨਹੀਂ ਹੈ ਲਖਾਇਆ ਜੇ ਕੋਈ ਹੈ ਤਾਂ ਸਹੀ ਲਖਾਇਆ ਜੇ ਕੋਈ ਨੂੰ ਨਾ ਪਰਈ ਫੰਕ ਵਿਚਾਰਾ ਫਲ ਦੀ ਫੰਕ ਕੀ ਹੈ ਅੱਜ ਉਹ ਜਿਹੜੇ ਅੱਗੇ ਅੱਗੇ ਫਲਕੇ ਵੱਲਦੇ ਧੋੜੀ ਹੋਇਆ ਆਇਆ ਫੜੀ ਨਹੀਂ ਧੋ ਫੜੀ ਨਹੀਂ ਹੈ एक फंक तक रख ले पहला पहला आतू नु दा चीर लेवे जे परातू लूगा फड़ की है आतम चीरण जे मन को कोई खोजो भाई जे मन खोज ले एक फंक रख ली और फड़ फंक को फड़ की है फंक यदि ये देख ज्ञान भाड़ा ना ज्ञान भाड़ा ਜਦੋਂ ਤਾਂ ਤਾਂ ਫਿਰ ਸਮਝੇ ਹੈ ਨਾ ਫੰਕ ਕੀ ਹੈ ਫੰਕ ਦਾ ਜਿਹੜਾ ਮਾਨ ਹੈ ਪਹਿਲਾਂ ਤਾਂ ਇਹ ਫੰਕ ਹਾਥਾ ਪਰਨੇ ਤੋਂ ਫੰਕ ਹੈ ਪਹਿਲਾਂ ਆਦਮ ਜੀਨ ਪ੍ਰਾਦਮ ਜੀ ਲੋ ਭਜਕ ਹੋ ਗਿਆ ਪ੍ਰਾਦਮ ਜੀਨ ਦਾ ਲਖਾ ਜੋ ਕੋਈ ਦੋਨੋਂ ਦਾ ਪੜਈ ਫੰਕ ਵਿਚਾਰਾ ਹੈ ਦੋਨੋਂ ਫੰਕ ਵਿਚਾਰ ਨਹੀਂ ਅਬੇ ਗੋਰੀ ਨੀ ਦੇ ਕੋਰੇ ਜੁੱਤੇ ਦੂਨ ਨਾ ਪੜੇ ਤੋ ਜੋੜ ਕੇ ਤੇ ਦੂਰ ਤਾਂ ਦੋ ਨਾੜੇ ਜੇ ਕੋ ਗਿਆ ਬੇ ਲਸੀ ਜੋ ਕਾ ਵਡਲਿਆ ਜਦੋਂ ਦੇ ਜੋ ਸੋਚੇ ਕਾ ਵਡ ਹੋ ਗਿਆ ਸਰੀਰ ਫਿਰ ਬਾਇ ਜੋ ਅਡ ਹੋ ਗਿਆ ਆਪਣੇ ਬੂਲ ਦੇ ਜਾਣੜੇ ਦੂਰੋਂ ਪੜੇ ਫੱਕ ਵਿਚਾਰਾ ਤਾਵਣ ਫਾਂ ਤਾਂ ਸਭੈ ਤਨ ਹਾਲ ਹੈ بس او جڑی پھل دی تھوک کر باجے جو kvar جو بن پھل اکے پھول گرے بول نہ اگے ڈار دوبارہ جاں منڈے ڈار نہیں لگڑے بول نہ اگے ڈار سوارے جڑے تان لے نو اگے نو جرب ہوڑے تے سارے ہی توڑتے جڑے جاں ہوڑے سی نا سارے ہی ختم ہو گئے سبے توں پھارے اگلے ਜਿੱਦਿਆ ਮੂਰਦਾ ਬੜੀ ਹੋਈ ਜਾਂਦੀ ਨਾ 84 ਲੱਖ ਦੁਬਾਰਾ ਸਰਵ ਡਾਤੀਓ ਤੋੜ ਦਿਆ ਬਸ ਸਾਰੇ ਤਾਗ ਦੇ ਫਾੜਦੇ ਲੋੜੇ ਦੀ ਗਾਉਂ ਜਰਬ ਲੈਣ ਦੀ ਇਹ 84 ਲੱਖ ਜੂਰ ਘਟੀ ਗਈ ਉਹਦੀ 84 ਉਹ ਘਟੀ ਗਈ ਸਭਾ ਤਰਫ ਆ ਜਦੋਂ ਆਤਬਦੀ ਸਮਝ ਆ ਗਈ ਬਰਗ ਹੋ ਗਿਆ ਉਹ ਦੋਈ ਜਿਹੜਾ ਸੀ ਤਾਂ ਟੱਕੇ ਲਈ। ਸੱਚਾ ਤਾਂ ਉਦੋਂ ਹੀ ਛੁੱਟ ਗਿਆ।